ਤੇ ਲੋਕ ਮਹੱਲਾ ਤੀਜਾ ਤੇ ਸੁਖ ਉਪਜੈ ਫਿਰ ਦੁੱਖ ਨ ਲੱਗੇ ਆਏ ਜੰਮਣ ਮਰਨਾ ਮਿਟ ਗਿਆ ਕਾਲੇ ਕਾ ਕਿਛ ਨ ਗੁਰਸੇਵਾ ਤੇ ਸੁਖ ਉਪਜੈ ਗੁਰਸੇਵਾ ਤੋਂ ਸੁਖ ਹੀ ਦੁੱਖ ਤਾਂ ਨੇੜੇ ਵੀ ਨਹੀਂ ਆਉਂਦਾ ਫਿਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨ ਲੱਗੇ ਲੱਗੇ ਆਏ ਖਾਲਸਾ ਦਾ ਕਹਨੇ ਭਰੋਸਾ ਕੋਈ ਨਹੀਂ ਮੌਤ ਦਾ ਕੋਈ ਭਰੋਸਾ ਇਸ ਕਰਕੇ ਸਮੇਂ ਦਾ ਕੋਈ ਪਰੋਸਾ ਨਹੀਂ ਹੈ ਕੋਈ ਵੀ ਇੱਕ ਖਿੰਤ ਤਸਬਿਰ ਜੀਵਨ ਅੰਦਰ ਤਾਂ ਜਾ ਜਾਣਾ ਇੱਕ ਖਣ ਵੀ ਨਹੀਂ ਚਾਹੀਦਾ ਸਾਨੂੰ ਹਰ ਵਕਤ ਆਪਣੇ ਜਾਗਦਾ ਰਹਿਣਾ ਚਾਹੀਦਾ ਹਾਂਜੀ ਜੰਮਣ ਮਰਨਾ ਮਿਟ ਗਿਆ ਕੱਲੇ ਨਾ ਬਸਾਈ ਜੰਮਣ ਮਰਨਾ ਮਟਾ ਕੇ ਹੀ ਚੱਲਣੀ ਜੈਲੀਏ ਕਾਲ ਦਾ ਕੋਈ ਕਰੋਸਾ ਨਹੀਂ ਇਹ ਨੂੰ ਚਾਹੀਦਾ ਕਾਲ ਨੂੰ ਰਬਨ ਦੇ ਰੱਖਣਾ ਚਾਹੀਦਾ ਆਪਣੇ ਕਾਬੂ ਵਿੱਚ ਕਾਲ ਕੀ ਕਾਲ ਕਾਲ ਪੜੀ ਹੈ ਕਾਲ ਪੜਾ ਗਈ ਨੇ ਮਾਰ ਲਈ ਆਪਣੀ ਕਾਲ ਮਾਰ ਲੈ ਉਹਨੇ ਹਰ ਸੇਤੀ ਮਨ ਰਵ ਰਹਾ ਸੱਚੇ ਰਹਿਆ ਸਮਾਏ ਨਾਨਕ ਹਉ ਬਲਿਹਾਰੀ ਤਿੰਨ ਕੋ ਜੋ ਚੱਲਣ ਸਤਿਗੁਰ ਪਾਏ ਜਿਹਦਾ ਹਰ ਦੇ ਨਾਲ ਮਨ ਰਵਿਆ ਹੋਇਆ ਨਾ ਆਪਣੇ ਮੂਲ ਨਾਲ ਜਿਹਦਾ ਮਨ ਜੁੜਿਆ ਹੋਇਆ ਹੈ ਉਹ ਸੱਚੇ ਦੇ ਵਿੱਚ ਹੈ ਤੇ ਮੂਲ ਸੱਚਾ ਹੈ ਮਨ ਝੂਠਾ ਹੈ ਜਦ ਮਨ ਸੱਚੀ ਬਾਣੀ ਨੂੰ ਚੱਲਦਾ ਤਾਂ ਸਤਿਆਰਾ ਬਣ ਜਾਂਦਾ ਫਿਰ ਆਪਣੇ ਹੋਰ ਤੇ ਸਮਝ ਆ ਜਾਂਦਾ ਸੱਚੇ ਜ ਸਮਾਇ ਰਹਿੰਦੇ ਸੱਚੇ ਰਹਾ ਸਮਾਇ ਠੀਕ ਹੈ ਜੀ ਦੇ ਕੋ ਗਵਾਨ ਜਾਣੇ ਇੱਛਾ ਅਨੁਸਾਰ ਚੱਲਦੇ ਨੇ ਸਤਗੁਰ ਦੇ ਪਾਣ ਚੱਲਦੇ ਨੇ ਉਹਨਾਂ ਦੇ ਗਵਾਨ ਜਾਂਦੇ ਆਹ ਇੱਥੇ ਜਿਹੜਾ ਅੱਖਰ ਤਿੰਨ ਲਿਖਿਆ ਨਾ ਜੀ ਤਿੰਨ ਕੋ ਉਹਦੇ ਤੇ ਟਿੱਪੀ ਦੀ ਵਰਤੋਂ ਕੀਤੀ ਹੈ ਜੀ ਗਰਦੀ ਦੇ ਮਾਲਕ ਨੇ ਮਰਜ਼ੀ ਕਰਦੇ ਰਹੇ ਨਾ ਪੱਕੀ ਕਰੀਏ ਤਾਂ ਲੋਕਾਂ ਨੂੰ ਕਿ ਕੋਈ ਪੁੱਛਣ ਵਾਲਾ ਕਦੇ ਸੀਗਾ ਉਸ ਗੱਲ ਦਾ ਭਲੇਖਾ ਐ ਪੈਂਦਾ ਹੈ ਤਿੰਨ 3 ਨਾ ਬਣਦੀ ਇਤੋਂ ਇਹ ਪਤਾ ਲੱਗਦਾ ਲੋਕਾਂ ਨੂੰ ਕੱਖ ਵੀ ਨਹੀਂ ਸੀ ਪਤਾ ਜਿਹੜੇ ਛਾਪੇ ਵਾਲੇ ਆਪ ਗਿਆਨ ਕੋਈ ਨਹੀਂ ਸੀ ਪਰਵਾਹ ਕੀਤੀ ਕੋਈ ਨਹੀਂ ਸਿੱਖਤ ਸੀ ਵੀ ਇਹਦਾ ਕੁਝ ਵੀ ਬਦਲਣਾ ਨਹੀਂ ਹੈ ਲਗ ਬਹੁਤ ਜ਼ਿਆਦਾ ਮਤਰਾ ਨਹੀਂ ਹੋ ਗਈ ਬਦਲੀ ਇਹਨਾਂ ਲੋਕਾਂ ਦੀ ਵੀ ਜਿਹਨਾਂ ਸੰਸਾਰ ਸੀਗਾ ਗਾਜੀ ਰਧਾਤਾ ਤੇ ਇਹ ਲੋਕਾਂ ਨੇ ਸੱਦਾ ਬਣਾਇਆ ਸੀ ਹਾਂ ਚਾਰੇ ਤੁਹਾਨੂੰ ਪੰਕਤੀਆਂ ਪੜ੍ਹ ਦੇਣਾ ਜਿਨ੍ਹਾਂ ਵਿੱਚ ਇਹ ਤੱਤੇ ਨੂੰ ਠੀਕ ਹੈ ਜੀ ਪਹਿਲਾ ਮੈਂ ਤੁਹਾਨੂੰ ਸ਼ਬਦ ਪੜ੍ਹਦਾ ਜੀ ਬਿਹਾਗੜਾ ਮਹੱਲਾ ਪੰਜਵਾਂ ਬਹੁਤ ਖਜ਼ਾਨਾ ਤਿੰਨ ਪੈ ਹਰ ਜਿਓ ਹਰ ਕੀਰਤਨ ਲਾਹਾਰਾਮ ਇਹਨੂੰ ਇਹਨਾਂ ਨੂੰ ਸੁਣਾਤਾ ਇਹਨਾਂ ਨੂੰ ਇਹਨਾਂ ਕੋ ਉਹਨਾਂ ਨੂੰ ਪਤਾ ਹੀ ਨਹੀਂ ਸੀ ਇਹਨੇ ਕੀ ਕਰ ਰਹੇ ਠੀਕ ਹੈ ਜੀ ਤੇ ਹਾਂ ਸੋਰਠ ਕੀ ਵਾਰ ਚ ਟਿੱਪੀਆਂ ਜ਼ਿਆਦਾ ਲੱਗੀਆਂ ਲੱਗਦੀਆਂ ਜੀ ਕਿਉਂਕਿ ਹਾਂ ਬਲਿਹਾਰੀ ਤਿੰਨ ਤੇ ਵੀ ਟਿੱਪੀ ਲਾਤੀ ਫਿਰ ਕੌ ਤੇ ਵੀ ਲਾਤੀ ਉਹ ਕੌ ਬਣ ਗਿਆ ਕੋਈ ਜਿਹੜੇ ਖੋਜੀ ਨੇ ਹਜ਼ਾਰ ਗਲਤੀਆਂ ਔਰ ਇਹ ਬਤਲਫ ਦੇ ਜੋ ਕਹਿੰਦੇ ਨੇ ਉਹ ਸਾਜ ਕਹਿੰਦੇ ਨੇ ਗੁੱਜ ਇਹ ਕਿਵਲਾ ਗੀ ਚਪੀ ਇਹ ਗੱਲਾਂ ਨਾ ਕਹੋ ਹੋਏ ਕਹਿੰਦੇ ਜਿਹਨਾਂ ਠੀਕ ਹੈ ਜੀ ਇਹ ਤੀਸਰੀ ਜਗ੍ਹਾ ਆਪਾਂ ਹੁਣੇ ਪੜਿਆ ਜੀ ਨਾਨਕ ਹੋਂ ਬਲੇਹਾਰੀ ਤਿੰਨ ਕੋ ਜੋ ਚੱਲਣ ਸਤਿਗੁਰ ਇੱਥੇ ਵੀ ਤਿੰਨੇ ਆਊਗਾ ਨਾ ਜੀ ਤਿੰਨ ਕੋ ਸਾਰੀ ਜਗ੍ਹਾ ਇੱਥੇ ਤਿੰਨ ਦਾ ਸ਼ਬਦ ਵਰਤਿਆ ਹੀ ਨਹੀਂ ਹੋਇਆ ਗੁਰਬਾਣੀ ਵਿੱਚ ਕਿਤੇ ਫਰੀਦੀ ਸੰਸ ਵਿੱਚ ਇੱਦਾਂ ਨਹੀਂ ਵਰਤਿਆ ਤਿੰਨ ਲਖਸ ਵਰਤਿਆ ਹੈ ਫਿਰ ਫੋਨ ਹੈ ਮਹਿਲਾ ਚ ਵੀ ਇਸ ਤਰ੍ਹਾਂ ਗਲਤੀ ਹੈ ਜੀ ਹਰ ਹਾਂ ਹਾਂ ਬਲਹਾਰੀ ਤਿੰਨ ਜੇ ਦਰਗਹ ਜਾਣਿਆ ਕਿਦੀ ਨਹੀਂ ਸੰਸ ਵਿੱਚ ਵਰਤਿਆ ਹੋਇਆ ਜਦੋਂ ਪਤਾ ਲੱਗੇ ਇਹਨਾਂ ਨੂੰ ਸਾਹਸ ਹੁਸਤੀ ਕਰ ਗਿਆ ਹੁਣ ਇਹ ਜਾਣ ਲਗੇ ਉਹਨੂੰ ਲੁਕਾਉਣ ਵਾਸਤੇ ਵੀ ਕੁਝ ਕਰ ਰਹੇ ਨੇ ਲੋਕ ਇਹੀ ਅੱਖਰ ਤਿੰਨ ਬਿਨਾ ਟਿੱਪੀ ਤੋਂ ਗੁਰਬਾਣੀ ਵਿੱਚ ਮੁਕਤਾ ਰੂਪ ਵਿੱਚ ਜਿਵੇਂ ਇੱਥੇ ਲਿਖਿਆ ਹੈ 727 ਵਾਰ ਹੁੰਦਾ ਜੀ ਪਰ ਉੱਥੇ ਬਦਲ ਨਹੀਂ ਸੈਂਸ ਵੀ ਨਹੀਂ ਬਣਦੀ ਹੈ ਉੱਥੇ ਤਿੰਨੇ ਦੇ ਅਰਥ ਕੀਤੇ ਠੀਕ ਹੈ ਜੀ ਇੱਕ ਉੱਤੇ ਕੀਤੇ ਨਹੀਂ ਹਾਂ ਵਿੱਚ ਜਿਹੜੇ ਉੱਥੇ ਤਿੰਨ ਦਾ ਤਿੰਨ ਗੱਲ ਹੈ ਠੀਕ ਦੋ ਜਿਹੜਾ ਕੀਤਾ ਗਲਤੀ ਦੋ ਜਗ੍ਹਾ ਉੱਤੇ ਟਿੱਪੀ ਨਹੀਂ ਹੈ ਠੀਕ ਹੈ ਹੋਰ ਜੇ ਟਿੱਪੀ ਹੈ ਉੱਥੇ ਅਰਥ ਨਹੀਂ ਕੀਤਾ ਹਾਂਜੀ ਇੱਥੇ ਵੀ ਹੁਣ ਜਿਵੇਂ ਜਪਜੀ ਸਾਹਿਬ ਜਿਹਾਉਂਦਾ ਤਿੰਨ ਕੇ ਨਾਮ ਅਨੇਕ ਅਨੰਤ ਕਰ ਗਲਤੀ ਹੈ ਤੇ ਉਸੇ ਹੀ ਛਾਪੇ ਦੀ ਗਲਤੀ ਦੀ ਸੁਧਾਈ ਚਾਹੀਦੀ ਸੀ ਇਹਨਾਂ ਨੇ ਅਰਥ ਉਹਨੂੰ ਸਹੀ ਮੰਨ ਕੇ ਕਰਤੇ ਉਹ ਵਸੇ ਇਦਾਂ ਹੀ ਕਰਦੇ ਰਹਿੰਦੇ ਨੇ ਉਹ ਵਿਦਵਾਨਾਂ ਦੇ ਕੋਲ ਵਿਚਾਰਾਂ ਸੁਣ ਕੀ ਹੁੰਦਾ ਜੀ ਤੀਜਾ ਸ਼ਬਦ ਸੁੱਧ ਨਾ ਹੋਵਈ ਜੇ ਅਨੇਕ ਕਰੇ ਸ਼ਿੰਗਾਰ ਫਿਰ ਸਾਰ ਨਾ ਜਾਣਈ ਦੂਜੇ ਭਾਏ ਪਿਆਰ ਜਿੰਨਾ ਮਰਜ਼ੀ ਕਹਿੰਦੇ ਭੇਖ ਬਣਾ ਲਓ ਸ਼ਿੰਗਾਰ ਕਰ ਲਓ ਉਪਦੇਸ਼ ਤੋਂ ਸ਼ਬਦ ਤੋਂ ਬਿਨਾ ਫਿਰ ਸੁੱਧ ਨਹੀਂ ਹੋ ਸਕਦਾ ਆਰਡਰ ਤੋਂ ਗੁਰਨੇ ਬਤੇਲੇ ਬਣਾਏ ਹੋਏ ਲੋਕਾਂ ਦੇ ਅਨੇਕਾਂ ਪੇਖ ਬਣਾ ਲਓ ਚਨਾਰ ਦੇ ਉੱਤੇ ਪੇਖ ਬਣਾਉਣਾ ਕਿਸੇ ਕਿਸਮ ਦਾ ਵੀ ਤੁਸੀਂ ਪੇਖ ਬਣਾ ਲਓ ਉਹਦੇ ਨਾਲ ਸ਼ੁੱਧ ਹੁੰਦਾ ਸ਼ੁੱਧ ਕਹਦੇ ਨਾ ਉਹ ਸ਼ੁੱਧ ਹੋਊਗਾ ਫਿਰ ਸ਼ੁੱਧ ਕਰਨ ਵਾਲਾ ਉਪਦੇਸ਼ ਹੋਊ ਤਾਂ ਹੋਊਗਾ ਗੁਰਬਾਣੀ ਫਿਰ ਸ਼ੁੱਧ ਕਰਨ ਵਾਲਾ ਉਪਦੇਸ਼ ਹੈ ਇਹਦੇ ਨਾਲ ਸ਼ੁੱਧ ਹੋ ਜਾਂਦਾ ਹਿਰਦਾ ਸੁਣੇ ਤੇ ਸਮਝੇ ਤੇ ਮੰਨੇ ਤੇ ਉਹਦਾ ਸ਼ੁੱਧ ਹੋ ਸਕਦਾ ਮਨਜੁਦ ਹੋ ਸਕਦਾ ਨਹੀਂ ਹੋਣਾ ਆ ਮਤਲਬ ਹੈ ਹਾਂਜੀ ਫਿਰ ਕੀ ਸਾਰ ਨਾਲ ਜਾਣੀ ਦੂਜੇ ਭਾਏ ਪਿਆਰ ਫਿਰ ਕਿਹ ਨਾਲ ਜਾਣੀ ਦੂਜੇ ਭਾਏ ਪਿਆਰ ਜੇ ਮਾਇਆ ਦਾ ਪਿਆਰ ਹੈ ਉਹ ਨੂੰ ਕਰਦਾ ਕਿ ਪਤਾ ਲੱਗ ਜੂਗਾ ਫਿਰ ਤਾਂ ਕੇਤਨ ਭਾਇਆ ਜਣੇ ਇਹ ਬਾਹਰਲੇ ਸਰੀਰ ਨਾਲ ਪ੍ਰੇਮ ਹੈ ਜਿਹੜਾ ਪੰਜਾ ਤੱਤਾਂ ਨਾਲ ਸਰੀਰ ਹੈ ਜੇ ਇਹਦੇ ਖਾਤਰੇ ਸਭ ਕੁਝ ਸਾਥ ਦੇ ਦੀਏ ਹੈ ਇਹਦੇ ਨਾਲ ਉਹ ਹੈ ਇਹਦੇ ਖਾਤਰੇ ਕੰਮ ਕਰ ਲੈਣੇ ਇਹਦੇ ਖਾਤਰੇ ਸਾਡਾ ਧਿਆਨ ਇਹਦੇ ਖਾਤਰੇ ਸਾਰੀ ਬੁੱਧੀ ਦਾ ਇਸਤੇਮਾਲ ਤੇ ਨਾਲ ਦਾ ਪ੍ਰਿੰਦ ਦਾ ਸਵਾਲ ਮਤ ਜਿਹੜੀ ਹੈਗੀ ਖੁਦਾ ਜਿਹੜੀ ਮਾਇਆ ਵਾਲੇ ਪਾਸੇ ਲੱਗੀ ਹੋਈ ਹੈ ਮੰਦੇ ਪਿੱਛੇ ਲੱਗੀ ਹੋਈ ਹੈ ਜਿਹੜੀ ਬਾਣੇ ਨੂੰ ਨਹੀਂ ਉਹ ਉਹ ਇਹ ਜਿੰਨੀਆਂ ਵੀ ਮਤਾਂ ਨੇ ਉਹਨਾਂ ਸਾਰਿਆਂ ਦੇ ਵਿੱਚੋਂ ਕੁਨਾਰ ਭੈੜੀ ਮਤ ਹੈ ਨਾਰੀ ਦਾ ਉਹ ਹਰ ਵਕਤ ਅੱਛਾ ਕਰਨ ਤੇ ਲੱਗੀ ਰਹਿਵੇ ਉਹ ਨਹੀਂ ਤਾਂ ਕੁਨਾਰ ਹੈ ਫਿਰ ਮਤਲਬ ਹੈ ਨਾਰੀ ਦੇ ਭੇਖ ਚ ਕੁਨਾਰ ਹੈ ਇਹ ਮਤਾਂ ਦੀ ਗੱਲ ਹੋ ਰਹੀ ਹੈ ਜੀ ਜਿਹੜੀਆਂ ਮਨ ਮਤਾਂ ਹਾਂ ਨਾਰੀ ਦੇ ਵਿੱਚ ਜਿੰਨੀਆਂ ਵੀ ਮਤਾਂ ਨੇ ਉਹਨਾਂ ਤੇ ਕੁਨਾਰ ਹੈ ਉਹ ਵਾਰੀਆਂ ਨਾਲ ਜੇ ਢਾੜੀ ਹੁੰਦਾ ਕਹਿਣ ਵਾਲਾ ਤੇ ਪੰਕਤੀ ਨਾਲ ਪਿਛਲੇ ਨਾਲ ਫਿਰ ਕੀ ਸਾਰ ਨਾ ਜਾਣੇ ਦੂਜੇ ਭਾਈ ਪਿਆਰ ਹੈ ਜੀ ਬਾਹਾਂ ਦੀ ਧੋਖਾ ਜਿਹੇ ਦੇ ਪਰ ਇਹ ਆਪਾਂ ਮਤ ਦੀ ਗੱਲ ਕਰਾਂਗੇ ਜੀਵ ਦੀ ਗੱਲ ਕਰਾਂਗੇ ਜਿਹੜਾ ਪਿਆਰ ਉਹਦੀ ਗੱਲ ਹੋ ਰਹੀ ਜੀ ਕੋਈ ਗੱਲ ਹੈ ਜਿਹੜੀ ਬੁੱਧੀ ਦੀ ਗੱਲ ਕਰਾਂਗੇ ਜਾਂ ਮਤ ਦੀ ਗੱਲ ਕਰਾਂਗੇ ਮਤ ਵੀ ਤਾਂ ਬੁੱਧੀ ਨੇ ਜੋ ਘੜ ਲਿਆ ਆਪਣੇ ਆਪ ਨੂੰ ਬਣਾ ਲਿਆ ਉਹ ਮਤ ਬਣ ਗਈ ਜੋ ਆਪਣਾ ਰੂਪ ਬਣਾ ਲਿਆ ਬੁੱਧੀ ਨੇ ਉਹੀ ਤਾਂ ਮਤ ਹੈ ਮਤ ਪੜੀ ਹੋ ਗਈ ਉਹ ਦੀ ਕੋਈ ਪੜੀ ਹੋ ਨਹੀਂ ਉਹ ਜਿਹੜਾ ਰੂਪ ਮਤ ਹੈ ਤੇ ਇਹ ਬੁਰੀ ਹੈ ਤਾਂ ਬੁਰੀ ਰੂਪਾ ਖੁਜਾਤ ਕੋ ਲਖਣੀ ਉਹ ਜਿਹੜੀ ਮਤ ਹੈ ਉਹ ਅਸਲ ਵਿੱਚ ਮਤ ਨਾ ਹੋ ਕੇ ਨਾਰੀ ਨਾ ਹੋ ਕੇ ਕੋ ਨਾਰ ਨਾਰ ਠੀਕ ਹੈ ਜੀ ਪੌੜੀ ਹਰ ਹਰ ਆਪਣੀ ਦਇਆ ਕਰ ਹਰ ਬੋਲੀ ਬੈਣੀ ਹਰ ਨਾਮ ਤੇ ਆਏ ਹਰ ਉਚਰਾ ਹਰ ਲਾਹਾਂ ਲੈਣੀ ਜੇ ਤੁਮ ਕਹਿਣਾ ਤੇਰਾ ਬਲਾਇਆ ਬੋਲਾ ਤੇਰੀ ਉਹ ਤੇਰਾ ਬਲਾਇਆ ਬੋਲਾ ਹਰ ਨਾਮ ਆਈ ਹਰ ਲੈਣੀ ਹਰ ਨਾਮ ਦੇ ਵਿੱਚ ਮੈਂ ਨਾਮ ਉਚਾਰਨ ਕਰਾਂ ਹਰ ਨਾਮ ਤੇ ਆਇੰਨੀ ਹਰ ਉਚਰਾ ਹਰ ਲਾਹਾਂ ਲੈਣੀ ਹਰਦਾ ਹੀ ਲਾਹ ਲਵ ਠੀਕ ਹੈ ਜੀ ਜੋ ਜਪਦੇ ਹਰ ਹਰ ਦਿਨਸ ਰਾਤ ਤਿੰਨ ਹੋਂ ਕੁਰਬੈਣੀ ਜਿਹੜੇ ਦਿਨ ਰਾਤ ਹਰ ਹਰ ਜਪਦੇ ਨੇ ਉਹਨਾਂ ਤੋਂ ਕੁਰਬਾਨ ਜਾਵਾਂ ਜਿਨ੍ਹਾਂ ਸਤਗੁਰ ਮੇਰਾ ਪਿਆਰਾ ਅਰਾਧਿਆ ਤਿੰਨ ਜਨ ਦੇਖਾਂ ਨੈਣੀ ਉਹ ਜਨ ਨੂੰ ਮੈਂ ਨੈਣੀ ਦੇਖਾਂ ਜਿਹਨਾਂ ਨੇ ਮੇਰਾ ਸਤਗੁਰ ਪਿਆਰਾ ਰਧਿਆ ਉਦੋਂ ਹੀ ਮੰਗਿਆ ਜੋ ਮੰਗਿਆ ਉਹਦੀ ਅਰਾਧਨਾ ਚੁੱਪੀ ਹੈ ਹੋਰ ਦੇ ਨੰਗੇ ਤੇ ਨਹੀਂ ਹੋਰ ਕਿਸੇ ਦਾ ਨਹੀਂ ਨੰਗੇ ਤੇ ਨਹੀਂ ਕਿਸੇ ਦਾ ਨਾਲ ਹੋਰ ਕਨੈਕਸ਼ਨ ਨਹੀਂ ਉਹਨਾਂ ਨਾਲ ਇਹਨਾਂ ਦੇਖਾਂ ਲੈਣੀ ਉਹਨਾਂ ਦਾ ਦਰਸ਼ਨ ਕਰ ਮੈਨੂੰ ਪਿਆਰ ਹੈ ਉਹਨਾਂ ਦਾ ਪਿਆਰਾ ਸਾਥ ਜੋ ਇਹਨਾਂ ਨੂੰ ਰੱਦੇ ਹਨ ਪਿਆਰ ਹੈ ਜਿਹੜੇ ਦਾ ਸੱਚ ਦੇ ਗਿਆਨ ਦਾ ਉਹ ਜਿਹੜਾ ਮੈਂ ਰੱਦੇ ਆ ਉਹਨਾਂ ਦਾ ਦਰਸ਼ਨ ਮੈਨੂੰ ਰਹੇ ਇਹ ਮੇਰੇ ਅੰਦਰ ਧੋਖ ਹੈ ਠੀਕ ਹੈ ਹੁਣ ਇੱਥੇ ਆਰਾਧਨ ਦੀ ਗੱਲ ਆ ਗਈ ਹੈ ਜੀ ਹੁਣ ਅਗਲੀ ਸਟੇਜ ਤੇ ਗੱਲ ਪਹੁੰਚ ਗਈ ਲੱਗਦਾ ਵਾਹ ਜੀ ਹਾਂ ਨਾਮ ਦੀ ਗੱਲ ਆ ਗਈ ਕੀ ਕਹ ਜ ਹਾਂ ਵਾਰਿਆ ਆਪਣੇ ਗੁਰੂ ਕੋ ਜਿਨ ਮੇਰਾ ਹਰ ਸੱਜਣ ਮੇਲਿਆ ਸੈਣੀ ਉਸ ਮੈਂ ਆਪਣੇ ਗੁਰੂ ਕੋ ਵਾਰਿਆ ਜਿਹਨੇ ਮੈਨੂੰ ਮੇਰੇ ਨਾਲ ਮੇਰਾ ਹਰ ਸੱਜਣ ਸੈਣੀ ਮੇਰਾ ਮੂਲ ਮੈਨੂੰ ਬੁਲਾਤਾ ਮੂਲ ਤਾਂ ਮਲਾ ਸਕਦਾ ਕੋਈ ਹੋਰ ਆਦਮੀ ਉੱਥੇ ਤੱਕ ਤਾਂ ਪਹੁੰਚਾ ਸਕਦਾ ਉਹប្រទេស ਉਦੋਂ ਗਾਂ ਫਿਰ ਆਰਾਧ ਨਹੀਂ ਕਮਰ ਮੂਲ ਨਾਲ ਇਹ ਫਿਰ ਸ਼ਬਦ ਗੁਰੂ ਦੀ ਗੱਲ ਹੋ ਰਹੀ ਹੈ ਕਿ ਹਾਂ ਵਾਰਿਆ ਆਪਣੇ ਗੁਰੂ ਕੋ ਗਿਆਨ ਗੁਰੂ ਮਿਲਾ ਸਕਦਾ ਦੇਖੋ ਨਿਰਾਕਾਰ ਦਾ ਜਿਹੜਾ ਦਰਸ਼ਨ ਕਰਾਉਣਾ ਗੁਰੂ ਹੀ ਹੈ ਬੁੱਧੀ ਨੂੰ ਬੁੱਧੀ ਨਾਲ ਪਰ ਤਾਂ ਪੂਰਾ ਚੈਨਲ ਹੋ ਜਾਣਾ ਦੂਰੇ ਚਾਣ ਦਾ ਨੋਗੁਰੂ ਆ ਦੂਰੇ ਚਾਣ ਦਾ ਨੋਗੁਰਾ ਪਹਿਲਾ ਸੀ ਕਿ ਜਿੰਨਾ ਸਤਗੁਰੂ ਮੇਰਾ ਪਿਆਰਾ ਆਰਾਧੇ ਆ ਤਿੰਨ ਜਨ ਦੇਖਾਂ ਨੈਣੀ ਇੱਥੋਂ ਫਿਰ ਹੁਣ ਗੁਰੂ ਕੋ ਗੱਲ ਅੱਗੇ ਆ ਗਈ ਗੱਲ ਨਾ ਠੀਕ ਹੈ ਉਹ ਦੇਖਾਂ ਲੈਣੀ ਦਾ ਉਹ ਆ ਗਿਆ ਨਾ ਦੇਖਣ ਵਾਲੀ ਗੱਲ ਨੈਣੀ ਦਾ ਭਾਵ ਤਾਂ ਹੈਗਾ ਕਿ ਬੁੱਧੀ ਨਾਲ ਦਰਸ਼ਨ ਬੁੱਧੀ ਨਾਲ ਉਹਨਾਂ ਨੂੰ ਸਮਝਾਂ ਮੈਂ ਸਰੀਰ ਦੇਖਾਂਗੇ ਨੋਦਰਨ ਨਾ ਨਾ ਦੇਖਿਆ ਜਾਊਗਾ ਇੱਥੇ 24ਵੀਂ ਪੌੜੀ ਦੀ ਸਮਾਪਤੀ ਹੈ